ਹਾਂਜੀ ਜੱਜੇ ਅਖਰ ਤੋਂ ਉਪਦੇਸ਼ ਹੈਗਾ ਜੀ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਨੇ 14ਵੀਂ ਪਉੜੀ ਚ ਉਪਦੇਸ਼ ਦਿੱਤਾ ਜੀ 52 ਅਖਰੀ ਚ ਹਾਂ ਜੀਵਤ ਜਰਾਵੈ ਜੋ ਬਨ ਜੁਗਤ ਸੋ ਪਾਵੈ ਹਾਂਜੀ ਜੱਜਾ ਜੋਤਨ ਜੀਵਤ ਜਰਾਵੈ ਜੇ ਆਪਣਾ ਜਿਹੜਾ ਤਨ ਜਿਉਦਾ ਜਾਂਦਾ ਯਾਰ ਲਵੇ ਫੇਰੋ ਜੋਵਨ ਜਾਲ ਜੁਕਤ ਸੋ ਪਾਵੇ ਉਹਨੂੰ ਮੁਕਤੀ ਦੀ ਯੁਕਤੀ ਸੀ ਸਮਝ ਆ ਜਾਂਦੀ ਹੈ ਬਾਹਰ ਦਾ ਸ਼ਰੀਰ ਵੀ ਝਾਲਣਾ ਅੰਦਰ ਜੋ ਗਿਆਨਤਾ ਉਝਾੜਨੀ ਹੈ ਅੰਦਰ ਜੋ ਕੂਟਕਵਾਲ ਹੈ ਨਾ ਇਕੱਠਾ ਕੀਤਾ ਹੋਇਆ ਕੂੜ ਗਿਆਨ ਉਹ ਕੂੜ ਗਿਆਨ ਝਾੜ ਦੇ ਪਹਿਲਾਂ ਪਰਦੇਸੀ ਕੇ ਖਾਖਰੇ ਚੋਂਦਸ ਤਾਂ ਜਾਊਗਾ ਬਾਜ ਕੂੜ-ਕੂੜ ਜਲ ਜਾਊਗਾ ਜੋ ਤਾਂ ਜੀਵਤ ਚਰਾਵਾ ਜੋ ਬਨ ਯਾਰ juxt so pa o jehda pehla hai na o nu joban ho da ahankar vele ganda ho jal janda ja te pher o nu yukti di samajh aundi acha ji eh joban ikka shabd hai ke do ta nahi hai ji ure ਆ ਕਹਾਣੀਆਂ ਸਾਥੀਆਂ ਸੁਖੀ ਉਹਨਾਂ ਗਿਆਨ ਜਿਹੜਾ ਹੈਗਾ ਹੋਰ ਕੀ ਹੈ ਠੀਕ ਹੈ ਜੀ ਉਹਨੂੰ ਪੱਥਰ ਚ ਉੱਨ ਲਗਿਆ ਧੱਲੇ ਨੂੰ ਆਏ ਗਿਆ 베ਰੀ ਦੇ ਦੁੱਖ ਭੰਡਣੀ 베ਰੀ ਦਾ ਗਿਆਨ ਹਾਂਜੀ ਇਹ ਹੈ ਕਾਹਰੇ ਬਨ ਖੋਜਣ ਜਾਈ ਬਨ ਦਾ ਗਿਆਨ ਜੰਗਲ ਜਾਨਵਰ ਰਹਿਣ ਪਹਿਲਾਂ ਤੇ ਇਹ ਠੀਕ ਹੈ ਜੰਗਲ ਜੰਗਲ ਕਿ ਆਪੋ ਅਸ ਜਰ ਪਰ ਜਰ ਜਰ ਜਬ ਰਹੇ ਤਬ ਜਾਏ ਜੋਤ ਪੁਜਾਰੋ ਲਹ ਮਮਤਾ ਜਿਹੜਾ ਆਪਣਾ ਪਾਣ ਮੈਂ ਜਿਹੜੀ ਅਸਨ ਮੈਂ ਪਰ ਆਪਣਾ ਅਰਪਰਾਇਆ ਜਦੋਂ ਦੋਏ ਚੀਜ਼ਾਂ ਜਾਲ ਦਿੰਦਾ ਨਾ ਕੁਛ ਆਪਣਾ ਨਾ ਕੁਛ ਪਰਾਇਆ ਕੋਈ ਬਾਹਰੀ ਨਹੀਂ ਬਗਲ ਜੋ ਕੋਸ਼ ਉਹ ਤੇ ਜਾਲੇ ਦੇ ਬਾਦ ਫਸ ਜਾਂਦਾ ਹੈ ਕੋਲ ਤਬ ਜਾਏ ਜੋਤ ਉਜਾਰੋ ਲਾਏ ਤਾਂ ਜਾ ਕੇ ਅੰਦਰ ਜੋ ਦੋ ਚਾਨਣ ਲਈ ਨੂੰ ਮੈਂ ਤੁਹਾਨੂੰ ਦੱਸਦੀ ਹਾਂ ਹੋਰ ਜਿਹੜਾ ਚਾਨਣ ਹੈ ਨਾ ਗਿਆਨ ਹੈ ਉਹ ਅਸਲੀ ਹੈ ਅੱਛਾ ਜੀ ਜੜ ਦਾ ਮਤਲਬ ਜਲਾਉਣਾ ਹੀ ਹੈ ਜਲ ਕੇ ਆਪਣਾ ਪਰਾਇਆ ਹੁੰਦਾ ਆਪਣੇ ਪਰਾਇਆ ਦੀ ਮਾਨਸਾ ਜਦੋਂ ਅੰਦਰੋਂ ਖੜ ਜਾਂਦੀ ਹੈ ਖਤਮ ਹੋ ਜਾਂਦੀ ਹੈ ਫਿਰ ਫਿਰ ਪ੍ਰੇਮ ਭਗਤੀ ਉੱਭਜਦੀ ਹੈ ਅੰਦਰ ਉਹ ਜਿਹੜਾ ਅੰਦਰ ਪ੍ਰੇਮ ਮਹਿਸੂਸ ਹੁੰਦਾ ਨਾ ਫਿਰ ਆਪਣਾ ਪਰਾਇਆ ਛੱਡ ਕੇ ਓ ਜਿਹੜਾ ਚਾਨਣ ਉਹ ਅਸਲ ਤੇ ਜਿਹੜੀ ਉਹ ਗੱਲ ਹੈ ਉਸ ਟਾਈਮ ਉਹ ਪੁਜਾਰੋ ਅਸ ਅਸ ਜਰ ਪਰ ਜਰ ਜਰ ਜਦ ਰਹੇ ਜਰ ਜਦ ਕੀ ਹੈ ਜੀ ਜਲ ਕੇ ਰਹਿੰਦਾ ਦੁਬਾਰਾ ਨਹੀਂ ਵੱਜਦਾ ਹੁੰਦਾ ਆਪਣਾ ਆਪਣਾ আচ্ছা ਫਿਰ ਉਹ ਮਨੂਰ ਜਲ ਕੇ ਕੰਚਨ ਰਹਿ ਗਿਆ ਹੈ ਮਨੂਰ ਜਲ ਗਿਆ ਕੰਚਨ ਠੀਕ ਹੈ ਤਬ ਜਾਏ ਜੋਤੀ ਪੁਜਾਰੋ ਲਹ ਜੋਦਾ ਚਰਨਾਂ ਫੇਰ ਆਉਂਦਾ ਸਮਝ। ਅੱਛਾ ਜੀ। ਕਹਿੰਦੇ ਦੀ ਬੁੱਧੀ ਭਜਦੀ ਹੈ ਨਾ ਉਹ ਠੀਕ। ਜੋਦ। ਕਹਿੰਦਾ ਬਾਬਾ ਵੀ ਆਪਣਾ ਜਿਹੜਾ ਭਰਮ ਹੈ ਉਹ ਜਾਣਨਾ ਹੈ ਜੀ। ਭਰਮ ਨਹੀਂ ਜਾਣਨਾ। ਠੀਕ ਹੈ ਜੀ। ਹੁਣ ਦੂਸਰਾ ਜਿਹੜਾ ਉਪਦੇਸ਼ ਹੈ ਜੀ ਜੱਜੇ ਅੱਖਰ ਤੋਂ ਉਹ ਹੈਗਾ ਜੀ ਗੁਰੂ ਨਾਨਕ ਸਾਹਿਬ ਦਾ। ਆਸਾ ਮਹੱਲਾ ਪਹਿਲਾ ਪੱਤੀ 11ਵੀਂ ਪੌੜੀ ਚ ਉਪਦੇਸ਼ ਹੈ ਜੀ। ਜਦ ਜਾਨ ਮੰਗਤ ਜਨ ਜੱਚੈ ਲੱਖ 84 ਪੀਖ ਭਵਿਆ ਮੰਗਤ ਜਨ ਜੱਚੈ ਮੰਗਤ ਕੀ ਮੰਗਦਾ ਜਾਨ ਮੰਗਤ ਜਨ ਜੱਚੈ ਮੰਗਦਾ ਜਿਹੜਾ ਜਾਚਣਾ ਕਰਦਾ ਰਹਿੰਦਾ ਹੈ ਇਹ ਹੈ ਜੀਵ ਉਹਦੀ ਮੰਗਿਆ ਇਹਨੂੰ 84 ਚ ਕਮਾਈ ਗਈ ਹੈ ਜਿਹੜਾ ਹੈ ਆਪਣੀ ਸਮਝ ਨਾਲ ਮੰਗੀ ਜਾਂਦਾ ਜੋ ਇਹਦੇ ਸਮਝ ਚ ਆਉਂਦੀ ਹੈ ਗੱਲ ਆਪਣੀ ਇੱਛਾ ਅਨੁਸਾਰ ਮੰਗੀ ਜਾਂਦਾ ਉਹ ਇਹਨੂੰ ਜਿੰਨੀ ਜੇ ਪਾਸੇ ਰੱਖਦਾ ਜੇ ਕਹੇ ਵੀ ਮੈਨੂੰ ਜਿਹੜਾ ਕੋ ਤੂੰ ਚਾਹੁੰਦਾ ਚੰਗਾ ਦੇ ਬਸ ਜੇ ਉਹ ਆਪਣੇ ਆਪ ਇਹ ਅਕਲਮੰਦ ਬਣ ਕੇ ਮੰਗੀ ਜਾਂਦਾ ਫਿਰ ਲੱਖ ਲਾਖ ਚ ਪਿਆ ਫਿਰਦਾ ਠਿਖਾਰੀ ਬਣਿਆ ਫਿਰਦਾ ਹੈ ਜੀ ਹਾਂ ਤਾਂ ਅਵਰ ਦੂਜਾ ਮੈਂ ਸੁਣਿਆ ਹਾਂ ਲੈਣੇ ਵਾਲਾ ਵੀ ਕੋਈ ਹੈ ਦੇਣੇ ਵਾਲਾ ਵੀ ਕੋਈ ਹੈ ਦੂਜਾ ਸੁਣਿਆ ਸੀ ਕੋਈ ਦੇਣੇ ਵਾਲਾ ਕੋ ਕਿੱਥੇ ਮੰਗਵਾ ਫਿਰਦਾ ਹੋਰ ਜਾਈ ਕੋਈ ਦੇਣੇ ਵਾਲਾ ਹੈ ਸਿਰਫ ਲੈਣੇ ਵਾਲਾ ਵੀ ਕੋਈ ਅਜੀਬ ਹੈ ਤੇ ਫਿਰ ਹੋਰ ਕੋ ਬਗੋ ਦੀ ਲੋੜ ਹੈ ਦੀ ਅੱਪੀ ਦੇ ਜਾਣੇ ਜਿਹੜਾ ਕੋ ਦਿੰਦਾ ਇਹ ਥਾਂ-ਥਾਂ ਕਦੇ ਕਿਤੇ ਜਾ ਕੇ ਮਾਸ ਖਰੋਦਾ ਕਦੇ ਕਿਤੇ ਉਪਰੋ ਸਾਥੀਆਂ ਇਹ ਵੀ ਜੋ ਨੇ ਆਦੇ ਕੇ ਕਿਤੇ ਕਦੇ ਕਦੇ ਅਰਦਾਸ ਕਰਦੇ ਕਿਸੇ ਗੁੰਦਰ ਚੜੇ ਜਾਂਦਾ ਕਦੇ ਕਿਸੇ ਬੂਰਤੀ ਬੂਰੇ ਚੜੇ ਜਾਂਦਾ ਕਦੇ ਕਿਸੇ ਉੱਤੇ ਜਾ ਕੇ ਕਰਦਾ ਕਿਸੇ ਦੇ ਕਹੇ ਤੇ ਸੰਤ ਕੋ ਅੱਛਾ ਜੀ ਇਹ ਇੱਕੋ ਕੀ ਹੈ ਮੰਗਦਾ ਤਾਂ ਇੱਕ ਮਨ ਇੱਕ ਚਿੱਤ ਹੋ ਗਿਆ ਮੰਗਦੇ ਦੋ ਇਕੱਠੇ ਹੋ ਹੁਕਮ अच्छा जी बंगर मेले दा इकट्ठे ही दे हे इक बंद खिदोत को हो गई अरदास करदा चाहे दुनियावी प्रसाद मांगना चाहे दुआ मांगदा अपने मतलब नु दो इकट्ठे हो जांदा ने भाईदारी रे ਬਟਾਖੇ ਪਰ ਫਿਰ ਵੀ ਇਹਨੇ ਵਿਚਾਰੇ ਬਣੀ ਬੈਠੇ ਨੇ ਮੈਂ ਕਿਹਾ ਇਹ ਗੁਰਮੁਖ ਦੀ ਅਵਸਥਾ ਹੈ ਪਰ ਮਨਮੁਖ ਹੋਰ ਜਗ੍ਹਾ ਤੋਂ ਮੰਗਦਾ ਹੈ ਜੀ ਅਸੀਂ ਤਾਂ ਮੰਗਦਾ ਤਰ੍ਹਾਂ ਫਿਰਦਾ ਹੁਣ ਹੈਗਾ ਜੀ ਉਪਦੇਸ਼ ਆਸਾ ਪੱਟੀ ਮਹੱਲਾ ਤੀਜਾ ਹਾਂਜੀ ਅੱਛਾ ਇਹਦੇ ਵਿੱਚ ਇੱਕ ਗੱਲ ਬਾਰ-ਬਾਰ ਆਉਂਦੀ ਉਨਾ ਵਿੱਚ ਲਗਭਗ ਮੂੜੇ ਅੱਖਰ ਦੀ ਵਰਤੋਂ ਹੋਈ ਹੋਈ ਹੈ ਪੱਤੀ ਮਹੱਲਾ ਤੀਜੇ ਚ ਪੰਡਤ ਜਿਹੜਾ ਆਇਆਗਾ ਉਹ ਮੂਰਖ ਪੰਡਤ ਹੈ ਇਹਦੇ ਪੰਡਰ ਦੇ ਪਿੱਛੇ ਲੱਗਣ ਵਾਲਾ ਦੇ ਚੇਲੇ ਨੂੰ ਮੂੜਾ ਹੀ ਕਹਿੰਦੇ ਅੱਛਾ ਜੀ ਉਹ ਫਿਰ ਕਿਸੇ ਨਾਲ ਉਹਨਾਂ ਦੀ ਗੱਲ ਹੋ ਰਹੀ ਹੈ ਤੀਸਰੇ ਪਾਛਾ ਦੀ ਹਾਂ ਕੋਈ ਚਰਚਾ ਹੀ ਹੋ ਰਹੀ ਹੈ ਤਾਂ ਗੱਲ ਪਾਛਾ ਦੀ ਉਹ ਕਹਿੰਦੇ ਆ ਜੀ ਜੱਜੈ ਜੋਤ ਹਿਰ ਤੇਰੀ ਮੂੜੇ ਮੰਤ ਗਿਆ ਪਛਤਾਵੇਂਗਾ ਆ ਤੇਰੀ ਜੋਤ ਅਕਲ ਹੱਲ ਨਹੀਂ ਪੜਤਨੇ ਬੁੱਧੀ ਮਾਰਦੀ ਤੇਰੀ ਹੱਲੇ ਬੂੜੇ ਅੱਗੇ ਗਿਆ ਪਛਤਾਣੇ ਕੌਣ ਕਹਾ ਪਛਤਾਣੇ ਨਾਲੇ ਕਹੀ ਜਨ ਵੀ ਦੇਰ ਵਾਲਾ ਇੱਕ ਹੈ ਲੈਲ ਵਾਲਾ ਇੱਕ ਨਾਲੇ ਬੰਗੀ ਜਾਂਦੇ ਅੰਦਰ ਸਭ ਕੁਝ ਫੇਰ ਉਹਦੇ ਕਹੇ ਤੇ ਫੇਰ ਚੱਲ ਜਾਂ ਲੈ ਚੱਲ ਉੱਲੋ ਤੇ ਫੇਰ ਆਕੇ ਲੱਗੇ ਦੇਖ ਕੁਤ ਪਾ ਬਣ ਲੰਦੇ ਨਾਲੇ ਕਹਿੰਦੇ ਪਰਮੇਸ਼ਰ ਦੇ ਜੇ ਉਹਦੇ ਕਰੇ ਬਲੇ ਇਹ ਸਭ ਕੁਝ ਹੋਇਆ ਫੇ ਤੇਰਾ ਕੀ ਉਹਦੇ ਮਨ ਨੂੰ ਹੀ ਮਨ ਨੂੰ ਕਹੇ ਬੁੱਧੀ ਸਮਝਾਉਦੀ ਹੈ ਮਨ ਨੂੰ ਅੱਛਾ ਜੀ ਇੱਕ ਸ਼ਬਦ ਤੂੰ ਚੀਨੈ ਨਹੀਂ ਫਿਰ ਫਿਰ ਜੂਨੀ ਆਵੇਂਗਾ ਆ ਇੱਕ ਸ਼ਬਦ ਹੈ ਜਿਹੜਾ ਅੰਦਰ ਤੇ ਅੰਤਰਾਦਮਾਂ ਦੀ ਆਵਾਜ਼ ਆ ਉਹਨੂੰ ਤੂੰ ਖੋਜਦਾ ਨਹੀਂ ਹੈ ਉਹਨੂੰ ਸੁਣਦਾ ਨਹੀਂ ਉਹਨੂੰ ਮੰਨਦਾ ਨਹੀਂ ਫਿਰ ਵਰ ਜੋ ਕਰੇਗਾ ਗੁਰਮਤਿ ਦੇ ਉਪਦੇਸ਼ ਨੂੰ ਖੋਜਿਆ ਨਹੀਂ ਇਹ ਜੋਨੀਆਂ ਚ ਵਾਲਾ ਇਹ ਦਾ ਉਪਦੇਸ਼ ਸੀ ਗੁਰਬਾਣੀ ਸੀ ਇਹਨੂੰ ਖੋਜਿਆ ਨਹੀਂ ਕਿਸੇ ਨੇ ਤੇ ਜੰਮੀਵਰੀ ਜਾਣ ਕੇ ਫਿਰ ਵਰ ਵਰ ਜੋ ਨਹੀਂ ਹੋਣ ਔਰ ਕੀ ਕਰਦੇ ਠੀਕ ਹੈ ਕਹਿਣਾ ਚਾਹੁੰਦੇ ਆ ਵੀ ਜੋਤੀ ਦਾ ਗਿਆਨ ਹਿਰਿਆ ਹੈ ਉਹਨੂੰ ਪੂਰਾ ਕਰੋ ਹਾਂਜੀ ਜੇ ਪਰਮ ਪਾਇਆ ਤੈਨੂੰ ਪਰਮ ਦੂਰ ਕਰਦੀ ਹੈ ਓਰਬਾਨੀ ਠੀਕ ਹੈ ਜੀ ਉਹ ਪਰਮ ਦੂਰ ਹੋ ਕੇ ਫਿਰ ਪੂਰਨ ਬ੍ਰह्म ਹੋ ਜਾਂਦਾ ਹੈ ਜੀ ਹਾਂ ਠੀਕ ਹੈ ਜੀ ਇਹ ਚੌਥੀ ਪੌੜੀ ਦਾ ਵਿਦੇਸ਼ੀਗਾ ਜੀ ਆਸਾ ਪਟੀ ਮਹਲਾ ਤੀਜਾ ਹੁਣ 52 ਅਖਰੀ ਮਹਲਾ ਪੰਜਵਾਂ ਚ ਪੌੜੀ ਦਾ ਵਿਦੇਸ਼ ਹੈ ਜੀ ਪੌੜੀ ਜੱਜਾ ਜਾਣੇ ਹੌ ਕਛ ਹੂਆ ਬੰਦਿਓ ਜਿਉ ਨਲਨੀ ਬ੍ਰह्म ਸੂਆ ਕਾਲ ਜੱਜਾ ਜੇ ਤੂੰ ਇਹ ਜਾਣਦਾ ਮੇਰੇ ਕੁਛ ਮੇਰਾ ਕੀਤਾ ਕੁਝ ਹੋ ਜਾਊਗਾ ਜਾਂ ਮੇਰੇ ਕੋਈ ਬੱਕਰੀ ਹਸਤੀ ਹ ਮੇਰੀ ਕੋ ਹਸਤੀ ਬੱਕਰੀ ਜੇ ਤੈਨੂੰ ਨਲਕੀ ਤੇ ਬਹਿ ਜਾਂਦਾ ਨਾ ਫੜ ਕੇ ਨਲਕੀ ਜਾਂਦੀ ਹੈ ਤੋਤਾ ਫਿਰ ਉਹਨੂੰ ਨਲਕੀ ਨੂੰ ਨਹੀਂ ਛੱਡਦਾ ਐ ਬੰਨਿਆ ਜਾਏਗਾ ਜੇ ਤੂੰ ਸ਼ਰੀਰ ਧਾਰਨ ਕਰਕੇ ਇਹ ਸਮਝਦਾ ਵੀ ਮੇਰੀ ਹਸਤੀ ਹੁਣ ਬੱਕਰੀ ਹੋ ਗਈ ਤਾਂ ਤੋਤਾ ਜਿਵੇਂ ਨਲਕੀ ਨਾਲ ਬਹਿ ਜਾਂਦਾ ਐ ਵਜੇਗਾ ਕਾਲ ਕਿ ਕ ਜੱਜਾ ਜਾਣੇ ਹੋਂ ਕਛੂ ਹੂਆ ਬਾਂਦਿਓ ਦੇ ਵਿੱਚ ਲੜਕੀ ਉਪਰ ਹੋਈ ਹੁੰਦੀ ਆ ਤੇ ਰੱਖ ਦਿੰਦੇ ਨੇ ਤੋਤਾ ਫੜਨ ਲੜਕਦਾ ਉਹ ਛੱਡਦਾ ਤਾਂ ਨਹੀਂ ਥੱਲੇ ਪਾਣੀ ਵਿੱਚ ਡੁੱਬ ਜੂਗਾ ਇਹ ਨਹੀਂ ਛੱਡਦਾ ਇਹਨੂੰ ਫਿਰ ਕੋ ਢੇਡੂ ਵੀ ਮੈਂ ਡੁੱਬ ਜੂਗਾ ਸੰਸਾਰ ਚ ਮੈਂ ਭੁੱਖਾ ਮਰ ਜੂਗਾ ਭਰਮ ਦੇ ਵਿੱਚ ਕੁੱਬ ਕੇ ਮੰਦੀ ਮਰਜੀ ਕਰਨ ਲੱਗਿਆ ਉਹ ਤੋਤੇ ਨੂੰ ਗੁਲਾਮ ਬਣਾ ਲੈਨੇ ਜੀ ਉਹ ਤੋਤੇ ਨੂੰ ਵੜ ਲੈਨੇ ਪੜਾਈ ਜਾਂਦੇ ਪਿੰਜਰੇ 'ਚ ਪਾ ਜੀ ਜੋ ਜਾਣੇ ਹੋਂ ਭਗਤ ਗਿਆਨੀ ਆਗੇ ਠਾਕੁਰ ਤਿਲ ਨਹੀਂ ਮੰਨੀ ਜੇ ਕੋਈ ਯਾਰ ਲਵੇ ਭਗਤਾਂ ਗੈਨੀ ਆ ਲੱਗ ਜਵੇ ਲੋਕਾਂ ਦੀ ਠਾਕਰ ਨੇ ਤਾਂ ਤਿਲ ਮੰਨਣੀ ਕੋਈ ਗਲਤਰੀ ਉਹਦਾ ਸਵਾਰਥ ਬੰਦਾ ਹੀ ਨਹੀਂ ਕਿਸੇ ਦੀ ਜਿਹੜੇ ਆਪਣੇ ਆਪ ਨੂੰ ਠਾਕੁਰ ਕੇ ਕਹਿੰਦੇ ਨੇ ਵੀ ਹਾਂ ਨਹੀਂ ਦੰਦਾ ਤਾਂ ਪਰਮੇਸ਼ਰ ਹੈ ਪਰ ਸਪਾਰਸ਼ ਨਾਲ ਦੀ ਉਹ ਲੱਗਦੀ ਹੈ। ਅੱਛਾ। ਸਾਡੀ ਸਪਾਰਸ਼ ਨਾਲ ਉਹ ਮਿਲਦਾ ਮੰਨਦਾ ਗਾਂ ਠਾਕੁਰ। ਤੇ ਜਿੰਨੀ ਵੀ ਗੱਲ ਨਹੀਂ ਮੰਨਦਾ ਕਦੀ। ਠੀਕ ਹੈ ਕੁਛ ਤਾਂ ਆਪਣੇ ਨਾਂ ਦੇ ਮੂਰੇ ਸਤਿਗੁਰੂ ਵੀ ਲਾ ਲੈਂਦੇ ਜੀ। ਮਹਾਨ ਸਤਿਗੁਰੂ ਨਹੀਂ ਲੱਗਦਾ ਇਹਨਾਂ ਸ਼ੁਕਰ ਕਰੋ ਤੁਸੀਂ। ਕਿ ਅੱਗੇ ਦੇ ਨਾਲ ਬੁਰੀ ਹੋਊਗੀ ਵੇਖਿਆ ਸਤਿਗੁਰੂ ਦਾ ਪਰਮੇਸ਼ਰ ਹੈ ਤਾਂ ਉਹ ਆਏ ਜੂਨ ਚ ਹੀ ਸਤਿਗੁਰੂ ਆਪਣੇ ਨਾਲ ਉਪਾਦੀ ਲਾ ਦਿੰਨੇ ਆ ਜੀ ਆ ਫਿਰ ਅੱਗੇ ਢਾਡਲ ਤਾਂ ਬਦਲ ਨਹੀਂ ਨਹੀਂ ਇੱਥੇ ਚੱਲਦੀ ਹੈ ਖਰੇ ਦਾ ਕੋਈ ਰੇਡ ਚੱਲਦਾ ਮਤਲਬ ਥੋੜੇ ਨੇ ਖੋਟੇ ਜ਼ਿਆਦਾ ਨੇ ਆ ਖੋਟੇ ਦੀ ਇੱਥੇ ਜ਼ਿਆਦਾ ਕੀਮਤ ਹੈ ਜੀ ਖੋਟੇ ਦੀ ਵਾਲਾ ਕੀਮਤ ਜੋ ਜਾਣੇ ਮੈਂ ਕਥਨੀ ਕਰਤਾ ਫਿਰਤਾ ਜਿਹੜਾ ਇਹ ਜਾਣਦਾ ਮੈਂ ਕੁਝ ਕਰਦਾ ਇਹ ਤੇ ਕਰ ਸਕਦਾ ਹਾਂ ਮੈਂ ਕੁਝ ਕਮਾਈ ਕਰ ਸਕਦਾ ਉਹ ਤਾਂ ਵਪਾਰੀ ਹੈ ਮੈਂ ਤਾਂ ਧਰਤੀ ਕੋਲੇ ਫਿਰਦਾ ਜਿਵੇਂ ਵਪਾਰੀ ਵਪਾਰ ਕਰਦੇ ਫਿਰਦਾ ਰਹੂਗਾ ਬਸਦਾ ਜੋ ਫਿਰਦਾ ਵਪਾਰੀ ਤਾਂ ਵਪਾਰ ਕਰਦੇ ਉਹ ਵਪਾਰੀ ਹੈ ਵਪਾਰ ਕਰਨਾ ਹੈ ਕੁਝ ਕਮਾਉਣਾ ਹੈ ਆਪਾਂ ਪਾ ਸੰਸਾਰੀ ਉਹ ਸੰਸਾਰੀ ਵਸਤਾ ਨਾਲ ਵਪਾਰੀ ਅੱਛਾ ਇਹ ਪ੍ਰਚਾਰਕ ਇਸੇ ਕੈਟਾਗਰੀ ਚ ਉਹ ਕਥ ਕਰਤਾ ਵਾਲੇ ਹੋਗੇ ਨਾ ਜੋ ਜਾਣੇ ਮੈਂ ਕਥ ਨਹੀਂ ਕਰਤਾ ਵਪਾਰੀ ਬਸਦਾ ਜਿਉਂ ਫਿਰਤਾ ਉਹ ਕਰਤਾ ਫਿਰ ਨਾ ਉਹ ਕਰਦੇ ਨੇ ਕਥਨੀ ਇਹ ਤਾਂ ਬੋਲਣ ਗੁਰਬਾਣੀ ਦੇ ਬੁਲਾਏ ਬੋਲਣ ਬੋਲਣ ਖੋਜ ਕੇ ਸਮਝ ਕੇ ਫਿਰ ਤਾਂ ਉਹ ਨਹੀਂ ਕਰਦੇ ਕਹਿੰਦੇ ਮੈਂ ਤਾਂ ਕੁਝ ਨਹੀਂ ਕਹਿੰਦਾ ਜੋ ਗੁਰਬਾਣੀ ਕਹਿੰਦੀ ਮੈਂ ਉਹ ਕਹਿਆ ਹਾਂ ਜੇ ਕਿਤੇ ਗਲਤੀਆਂ ਦੱਸ ਦੋ ਆਪਾਂ ਬਦਲ ਲੈਂਦੇ ਹਾਂ ਰਈ ਵੀ ਸਾਰਾ ਕੱਲ ਜੇ ਆਪਣੇ ਕੋਲੋਂ ਗੱਲਾਂ ਮਾਰੀ ਜਾਂਦੇ ਨੇ ਫੇਰ ਤਾਂ ਵਪਾਰੀ ਹੈ ਉਹ ਧਰਮ ਨਹੀਂ ਆਪਣੇ ਤੇ ਜੋ ਬਲਾਵੋ ਤੇ ਨਾਨਕ ਦਾਸ ਬੋਲੇ ਉਹ ਸਮਝ ਲਓ ਭਈ ਮੁਕਤ ਬਜ਼ਾਰ ਤੋਂ ਪਾਲਣ ਦਾ ਉਹਦਾ ਕੰਮ ਬਣ ਜਾਂਦਾ ਰੋਮੇ ਜਾਂ ਮਰ ਜਾਂਦੀ ਹੈ ਤੇ ਮਿਲ ਜਾਂਦਾ ਰੋਮੇ ਮਾਰੀ ਨਾਨਕ ਆਕੋ ਮਿਲੇ ਮੁਰਾਰੀ ਆ ਬੁਰਾਰੀ ਮਿਲ ਗਿਆ ਉਹ ਨੂੰ ਉਹ ਜਿਹੜਾ ਆਪਣੇ ਦੁਸ਼ਮਣ ਦੇ ਨਾਲ ਕਾਮਕ੍ਰੋਧ ਲੋਭ ਅਹੰਕਾਰਿਆਂ ਨੂੰ ਮਾਰ ਦੇਣ ਵਾਲਾ ਮਿਲ ਗਿਆ ਤੇਰੇ ਲੇੜੇ ਦੀ ਉਹ ਦੇਖਣ ਫਿਰ ਉਹਦੇ ਨਹੀਂ ਗਿਆਨ ਮਿਲ ਜਾਂਦਾ ਮੁਰਾਰੀ ਗੁਰਾਰੀ ਕਹਿੰਦੇ ਨੇ ਦੁਸ਼ਮਣ ਨੇ ਉਹਨਾਂ ਦਾ ਦੁਸ਼ਮਣ ਉਹਨੂੰ ਮਾਰਨ ਵਾਲਾ ਆ अच्छा नाम पर वो नाम गल है सतगुरु दी वो गल है फिर मां सतगुरु दी गल है सतगुरु नाम जो शुरू के है सतगुरु को नाम ही हुंदा और दी सतगुरु ते ਤਾਂ ਜੱਜੇ ਅੱਖਰ ਦਾ ਉਪਦੇਸ਼ ਇਹੀ ਹੈ ਕਿ ਜਦੋਂ ਤੱਕ ਆਪਾਂ ਆਪਣੀ ਜਿਹੜੀ ਮਨ ਮਤ ਨਹੀਂ ਤਿਆਗਦੇ ਤਦੋਂ ਤੱਕ ਆਪਣੀ ਜਿਹੜੀ ਹੈਗੀ ਜਮੋਤਨੀ ਹੋਈ ਹੈ ਤਦੋਂ ਤੱਕ ਆਪਣੇ ਕੋਲ ਪੂਰਾ ਗਿਆਨ ਨਹੀਂ ਹੈ ਜੀ ਆਏ ਆਪਣੀ ਬੁੱਧ ਤੇ ਖਾਬ ਲੈਣ ਮਤਲਬ ਆ ਹਾਂ ਜੀ ਗੰਗਾ ਕਹੇ ਦਾ ਰੰਗਾਰਾ ਦਾ ਜਮਨਾ ਦਾ ਦੁਰਮਤ ਪ੍ਰਧਾਨ ਜਦ ਤੱਕ ਜੀਵਨ ਮਰਨ ਦਾ ਚੱਕਰ ਚੱਲਿਆ ਰਹੂਗਾ ਬਿਲਕੁਲ ਇੱਥੇ ਜੱਜੇ ਅੱਖਰ ਦਾ ਚਾਰਾ ਬਾਣੀਾਂ ਦੇ ਉਪਦੇਸ਼ ਦੀ ਸਮਾਪਤੀ ਹੈ ਜੀ ਓਏ